ਕਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕਰ ਦਰ ਫਿਰ ਥਾਕੀ ਬਹੁ ਤੇਰੇ ਮਤੇਰੇ ਡੇਰੇ ਅੰਤੇ ਬਤੇਰੇ ਸੰਤਾਂ ਕੋਲ ਬਤੇਰੇ ਧਰਮ ਕੋਲ ਘਰਾਂ ਦਰਾਂ ਚ ਫਿਰ ਕੇ ਥਾਪਲ ਗਈ ਯਾਦ ਅੰਤ ਬੜੀ ਆਦਾਸਤਾ ਮੇਰੀ ਬਹੁਤ ਕੁਝ ਜਾਣਦੀ ਆ। ਪਰ ਇਹਦੇ ਨਾਲ ਦੱਸਦੀ ਸਰਦੀ ਐਨੀ ਜਿੰਦੀ ਹੈ। ਉਤਨੇ ਬੇੜੇ ਸਾਰੇ ਤੇਰੀ ਹਣ। ਹੂੰ। ਕਿੰਨੇ ਘਰ ਦਾ ਅੱਛਾ। ਭੁਗਤੀਆਂ ਨੇ। ਕਿੰਨੇ ਮਾਂ ਜੁਨਾਂ ਦੇ ਵਿੱਚ ਸੰਤਾਂ ਨੂੰ ਸੰਪਰਕ ਕੀਤਾ ਕਿੰਨੇ ਗੁਰੂਤਾਂ ਦੇ ਕੀਤਾ ਨੇ। ਕਿੰਨੇ ਤੋਂ ਹੰਤਰ ਲਏ ਨੇ ਕੋਈ ਅੰਤਰੀ। ਤੇ ਮਾਤ ਪਿਤਾ ਸੁਤਤੀਆਂ ਕੇਤੇ ਗੁਰ ਚੇਲੇ ਸਨ ਹੁਆ ਕਾਚੇ ਗੁਰ ਕਾ ਨਾ ਹੋਆ ਕਿਤੇ ਮਾਤ ਕੇਤੇ ਪਿਤਾ ਕੇਤੇ ਸੋਤ ਕੇਤੇ ਬਾਪ ਹੁਤੇ ਆਏ ਤੀਆਂ ਹਾਂਜੀ ਕੇਤੇ ਗੁਰ ਕੇਤੇ ਚੇਲੇ ਹੁਤੇ ਆਏ ਸੱਚ ਨਹੀਂ ਮਿਲਿਆ ਪਰ ਸੱਚ ਦੀ ਸੋਚੀ ਕੇ ਢੀ ਬਣੀ ਹੁਣ ਤੱਕ ਆਕਾ ਦਾ ਗੁਰੂ ਕੱਚੇ ਵਿਲੇ ਕੱਚਾ ਗਿਆਨ ਮਿਲਿਆ ਉਹਤੇ ਮੁਕਤੀ ਨਹੀਂ ਮਿਲ ਸਕੀ ਸੱਚੀ ਨਹੀਂ ਮਿਲਿਆ ਹਾਂਜੀ ਕੱਚਾ ਕੱਚਾ ਮਿਲਿਆ ਸੇਹ ਨਾਲ ਤੇ ਸਾਰੇ ਮਾਇਆ ਧਾਰੀ ਉਤੇ ਮਾਇਆ ਨਾਲੇ ਜੋੜ ਦਿੰਦੇ ਤੇ ਮਾਇਆ ਤੋਂ ਬਾਹਰ ਮੁਕਤੀ ਹੈ ਮਾਇਆ ਤੋਂ ਤਿਆਗ ਮਾਇਆ ਤੋਂ ਕੇ ਮੁਕਤੀ ਨਾਲ ਵਰ ਇੱਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਆਹ ਤੇਤੀ ਨਾਰ ਉਦਿਆਂ ਬੋਤ ਨੇ ਹਾ ਅਤਲ ਮੋਤ ਨੇ ਬਕਤ ਮੋਤ ਨੇ ਪਰ ਪਿੱਛੇ ਵਾਰ ਕੋਈ ਹੈ ਪਰਮੇਸ਼ਰ ਉਹ ਗਿਆਨ ਕੋਈ ਹੈ ਉਹਦੇ ਕੋਈ ਗੁੱਟੀਆਂ ਜਾਣੇ ਹੈ ਦਿਸ਼ਾ ਇਹਨੂੰ ਸੱਚ ਨੇ ਸੱਚ ਤੋਂ ਦਿਸ਼ਾ ਇਹਨੂੰ ਜੋ ਜਨ ਤੋਰੀ ਤੋ ਯੋ ਅਚਰ ਵਰ ਇੱਕ ਸਮਾਲ ਤੂਕਾ ਬਣਦਾ ਜੀ ਕੀਤੀ ਨਾਰ ਪਾਰ ਵਾਰੇ ਵਾਰੇ ਕੋਈ ਐ ਸੱਚਈ ਗੱਲ ਸੱਚ ਦੀਓ ਕਰਦੇ ਨੇ ਸਾਰੇ ਪਰ ਕਾਝਾ ਗਿਆ ਜੀਵਨ ਪ੍ਰਭ ਨਾਲ ਗੁਰਮੁਖਾਂ ਜੀਵਨ ਮਾਨ ਅਰੇ ਗੁਰੂ ਕੀ ਮੱਤ ਦਾ ਤਾਂ ਸਰੀਰ ਨਾਲ ਜੀਵ ਨੂੰ ਮੰਨਣਾ ਜਿਹੜੀਆਂ ਬਤਾਨੇ ਸਰੀਰ ਨਾਲ ਜਪੜਾ ਨਾਲ ਸਰੀਰ ਨਾਲ ਬੋਲਦੀਆਂ ਨੇ ਠੀਕ ਹੈ ਜੀ ਗੁਰੂ ਨਾਲ ਜੀਵ ਨੂੰ ਮੰਨਵਾ ਆਪਣੇ ਦੂਰ ਦੇ ਲੋਲ ਜੀਵ ਨੂੰ ਬੋਲਦੇ ਨੇ ਬਦਿਸਤੂਂਡ ਦੇ ਜਾਵ ਢੂਟ ਕੇ ਜਾਂ ਚੀਜ਼ ਵਸਤ ਪ੍ਰਾਪਤ ਹੋਈ ਤਾਂ ਘਰ ਪਾਇਆ ਮੇਲ ਪਿਆ ਸਤਿਗੁਰੂ ਬੁਲਾਇਆ ਮੇਲ ਕਹੋਇਆ ਜੇ ਸੱਚ ਤੇ ਚੱਲਣ ਵਾਲਾ ਕੋਈ ਗੁਰੂ ਬਣ ਗਿਆ ਉਹ ਕਹਿੰਦਾ ਸਤਿਪੁਰਖ ਤਾਂ ਅੰਦਰ ਹੈ ਸਤ ਸਰੂਪ ਤਾਂ ਤੂੰ ਆਪੇ ਬੀਲ ਪਿਆ ਕਾ ਸਤਿਗੁਰੂ ਬੁਲਾਇਆ ਠੀਕ ਹੈ ਉਹਨੇ ਕਹਾ ਤੂੰ ਬਾੜ ਕੇ ਨੂੰ ਢੋਲਦੀ ਸਦਾ ਰਹਿਣ ਵਾਲਾ ਗਿਆਨ ਜਿਨ੍ਹਾਂ ਦਾ ਆਨੰਦ ਪ੍ਰਾਪਤ ਸੁਣਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਠੀਕ ਹੈ ਜੀ ਆਨੰਦ ਆ ਗਿਆ ਜੀ